ਇੱਥੇ ਅਮਰਤ ਦਾ ਸਰੋਵਰ ਗੁਰੂ ਦਾ ਦਰਸ਼ਨ ਇੱਥੇ ਸਤਗੁਰਾਂ ਨੂੰ ਅਮਰਤ ਦਾ ਸਰੋਵਰ ਮੰਨਿਆ ਕੁਰਬਾਨੀ ਨੇ ਕਹਿੰਦੇ ਨੇ ਸਤਗੁਰ ਹੈ ਅਮਰਤ ਸਰ ਸਾਚਾ ਜਿਤ ਮਨ ਨਾਵੇ ਮੈਲ ਚੁਕਾਵਣਿਆ ਜਿਹੜੇ ਲੋਕੀ ਮਨ ਕਰਕੇ ਨਹਾਉਂਦੇ ਨੇ ਦਰਸ਼ਨ ਕਰਦੇ ਨੇ ਉਹਨਾਂ ਦੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ ਵਿਖੇਪਤਾ ਦੂਰ ਹੋ ਜਾਂਦੀ ਹੈ ਈਰਖਾ ਦੂਰ ਹੋ ਜਾਂਦੀ ਹੈ ਉਹ ਸੰਤ ਬਣ ਜਾਂਦੇ ਨੇ ਭਗਤ ਬਣ ਜਾਂਦੇ ਨੇ ਗੁਰਸਿੱਖ ਬਣ ਜਾਂਦੇ ਨੇ ਐਸਾ ਹੋ ਜਾਂਦਾ ਹੈ ਗੁਰੂ ਕੇ ਦਰਸ਼ਨ ਤੋਂ ਇਸ ਵਾਸਤੇ ਤੁਸੀਂ ਇੱਕ ਪ੍ਰਮਾਣ ਵੀ ਸੁਣਿਆ ਸੀ ਸਤਗੁਰਾਂ राग में ਰਾਗ ਵਿੱਚ ਆਖਿਆ ਇਹ ਜੀ ਦਰਸ਼ਨ ਕੋ ਬਲ ਜਾਓ ਗੁਰਜੀ ਕੇ ਦਰਸ਼ਨ ਕੋ ਦਰਸ਼ਨ ਕੋ ਬਲ ਬਲ ਜਾਓ ਗੁਰਚੀ ਕੇ ਦਰਸ਼ਨ ਕੋ ਦਰਸ਼ਨ ਜਾਓ ਜੀ ਦਰਸ਼ਨ ਕਾ ਬਲ ਜਾਓ ਗੁਰਚੀ ਦਰਸ਼ਨ ਕੋ ਦਰਸ਼ਨ ਕਾ ਬਲ ਜਾਓ ਗੁਰਚੀ ਦਰਸ਼ਨ ਕੋ ਦਰਸ਼ਨ ਕਾ ਬਲ ਜਾਓ ओ जीव सत गुण लाओ जप जप जीवा सत गुण लाओ जप जप जीवा सत गुण लाओ जप जप जीवा सत गुण लाओ जी दर्शन के बल जाओ सतगुरु दर्शन तो दर्शन का बल जाओ और जी के दर्शन ਸ਼ਬਦ ਇਸੇ ਇਹੋ ਹੀ ਸੁਣਾ ਸੁਣਿਆ ਸੀ ਸਤਗੁਰੂ ਮੂਰਤ ਕੋ ਬਲ ਜਾਓ ਮੂਰਤ ਵੀ ਦਰਸ਼ਨ ਦਾ ਹੀ ਨਾਮ ਹੈ ਇਸ ਫਰਕ ਹੈ ਕਿ ਜਿਹੜੀ ਤਿਵਾਰ ਨਾਲ ਇੱਕ ਸਰੋਤ ਦਰਸ਼ਨ ਜਿਹੜਾ ਕੰਨਾਂ ਨਾਲ ਸੁਣਨੇ ਆ ਸਤਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਅਸਾਂ ਅੱਖਾਂ ਕਰਕੇ ਨਹੀਂ ਕੀਤਾ ਕੰਨਾਂ ਨਾਲ ਸੁਣਿਆ ਹੋਇਆ ਗੁਰੂ ਨਾਨਕ ਦਾ ਦਰਸ਼ਨ ਕੰਨਾਂ ਨਾਲ ਸੁਣਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕੰਨਾਂ ਨਾਲ ਸੁਣਿਆ ਹੋਇਆ ਹੈ ਇਹਦਾ ਨਾਮ ਹੈ ਸਰੋਤ ਦਰਸ਼ਨ ਦੂਸਰਾ ਹੁੰਦਾ ਹੈ ਚਿੱਤਰ ਦਰਸ਼ਨ ਦੀਵਾਰ 'ਤੇ ਤਸਵੀਰ ਲੱਗੀ ਹੋਈ ਹੈ ਇਹਦਾ ਨਾਮ ਮੂਰਤ ਵੀ ਹੈ ਇਹ ਵੀ ਦੂਸਰਾ ਇਹ ਦਰਸ਼ਨ ਹੈ ਇਹ ਵੀ ਪ੍ਰਭਾਵਿਤ ਕਰਦਾ ਚੌਥਾ ਹੈ ਤੀਸਰਾ ਹੈ ਸੁਪਨ ਦਰਸ਼ਨ ਸੁਪਨੇ ਵਿੱਚ ਦਰਸ਼ਨ ਹੋਣਾ ਸੁਪਨੇ ਆਇਆ ਪੀ ਗਿਆ ਇਤਿਹਾਦਿਕ ਸੁਪਨੇ ਦੇ ਦਰਸ਼ਨ ਬਹੁਤ ਨੇ ਸੁਪਨੇ ਵਿੱਚ ਵੀ ਦਰਸ਼ਨ ਹੁੰਦਾ ਉਹ ਵੀ ਇੱਕ ਦਰਸ਼ਨ ਹੈ ਜੋ ਮਨੁੱਖ ਦਾ कर ਕਰ है ਤੇ चौथा दर्शन है ਪ੍ਰਤੱਖ दर्शन ਜਿਹੜਾ ਤੁਸੀਂ ਅੱਜ ਕਰ ਰਹੇ ਹੋ ਤੇ ਜਿਹੜਾ ਕੀਤਾ ਇਸ ਸਮੇਂ ਨੂੰ ਸਫਲ ਕੀਤਾ ਇਹਦਾ ਨਾਮ ਹੈ ਪ੍ਰਤੱਖ ਦਰਸ਼ਨ ਇਹਦੇ ਹੀ ਬਾਬਤ ਸੱਚੇ ਪਾਤਸ਼ਾਹ ਸਤਗੁਰਾਂ ਨੇ ਬਾਣੀ ਵਿੱਚ ਲਿਖਿਆ ਜਨਮ ਮਰਨ ਦੁੱਖ ਜਾਏ ਜਨਮ ਮਰਨ ਕਟਿਆ ਜਾਂਦਾ ਇਸ ਵਾਸਤੇ ਜਿੰਨੇ ਦਿਨ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇਸ ਅਲਾਕੇ ਵਿੱਚ ਆਣ ਕੇ ਦਰਸ਼ਨ ਦੇਣ ਦੀ ਜਿੰਨੇ ਦਿਨ ਸਤਗੁਰਾਂ ਨੇ ਰਹੇ ਹਨ ਤੁਹਾਨੂੰ ਪਤਾ ਹੋਣਾ ਕਿਸ ਤਰ੍ਹਾਂ ਦਾ ਕੀ ਕੀ ਪ੍ਰੋਗਰਾਮ ਹੈ ਉਹਨੇ ਜਨ ਵੱਧ ਚੜ ਕੇ ਸੰਗਤ ਆਣ ਕੇ ਦਰਸ਼ਨ ਕਰੋ ਸਤਗੁਰਾਂ ਦੇ ਦਰਸ਼ਨ ਤੋਂ ਲਾਭ ਸਤਗੁਰਾਂ ਦੇ ਉਪਦੇਸ਼ ਤੋਂ ਲਾਭ ਆਪਾ ਪ੍ਰਾਪਤ ਕਰਕੇ ਤੇ ਜਨਮ ਸਫਲ ਕੀਤਾ ਜਾਏ ਤੇ ਨਾਲ ਜਿਨ੍ਹਾਂ ਦੇ ਭਜਨ ਨਹੀਂ ਪੁੱਛਿਆ ਹੋਇਆ ਹੁੰਦਾ ਉਹ ਭਜਨ ਜਰੂਰ ਪੁੱਛ ਲਿਆ ਕਰੋ ਜਿਹੜਾ ਗੁਰ ਸਿੱਖ ਅਖਵਾਉਂਦਾ ਉਹਦੇ ਅੰਦਰ ਚ ਵਖਰਾ ਜਾਪ ਗੁਰੂ ਨਾਨਕ ਦਾ ਬਣਾਇਆ ਹੋਇਆ ਸਾਡੇ ਅੰਦਰ ਹਰ ਵਕਤ ਹੋਣਾ ਚਾਹੀਦਾ ਤੇ ਉਹਦਾ ਸਿਮਰਨ ਕਰਨਾ ਚਾਹੀਦਾ ਕਈ ਵਾਰੀ ਅਸੀਂ ਜਦੋਂ ਬੱਚਾ ਜਨਮ ਲੈਂਦਾ ਉਦੋਂ ਭਜਨ ਤੇ ਦੱਸ ਦਿੰਨੇ ਆ ਪਰ ਉਦੋਂ ਬੱਚਾ ਅਚੇਤ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਨੂੰ ਭਜਨ ਦੱਸਿਆ ਕਿ ਨਹੀਂ ਦੱਸਿਆ ਜਦੋਂ ਬੱਚਾ 5 ਸਾਲ ਦੀ ਉਮਰ ਤੋਂ ਉੱਚਾ ਹੋ ਜਾਏ 5 ਤੋਂ 10 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਦੁਬਾਰਾ ਭਜਨ ਫੇਰ ਦੱਸਣਾ ਚਾਹੀਦਾ ਤਾਂ ਕਿ ਉਹਨੂੰ ਹੋਸ਼ ਰਹੇ ਕਿ ਮੈਂ ਨਾਮ ਨਾਮ ਲਿਆ ਹੋਇਆ ਭਜਨ ਪੁੱਛਿਆ ਹੋਇਆ ਇਸ ਤਰੀਕੇ ਦਾ ਜਿਨ੍ਹਾਂ ਜਿਨ੍ਹਾਂ ਨੇ ਭਜਨ ਨਹੀਂ ਪੁੱਛਿਆ ਹੋਇਆ ਹੁੰਦਾ ਸਤਗੁਰਾਂ ਦੇ ਹਜ਼ੂਰ ਆਣ ਕੇ ਭਜਨ ਪੁੱਛ ਕੇ ਨਾਮ ਜਪ ਕੇ ਆਪਣਾ ਜੀਵਨ ਸਫਲ ਕਰੋ ਇਹਨਾਂ ਸ਼ਬਦਾਂ ਨਾਲ ਹੀ ਖਿਮਾ ਦਾ ਜਾਚਕ ਸਤਿ ਸ੍ਰੀ ਅਕਾਲ